ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸੁਸੱਜਣ ਟੋਲ ਖੰਭ ਵਿਕਾਂਦੜੇ ਜੇ ਐਤੇ ਪਊਗਾ ਲਹਾ ਫੇਰ ਕੋ ਮਾ ਪਊ ਕਿੰਨਾ ਸਾਵੀ ਤੋਲ ਖੰਭ ਵਿਕਾਂਦੜੇ ਜੇ ਕਦੇ ਹੋਂ ਬਤਾ ਲੱਗ ਜਵੇ ਤਾਂ ਮੈਂ ਤਾਂ ਲੈ ਲਵਾਂ ਲਹਾ ਜੇ ਲਹਾ ਨੇ ਜੇ ਕੋ ਕੋ ਲੌਣ ਜੇ ਹਮੋਂ ਤਾਂ ਮਾਇ ਲੈ ਲਾ ਮੈਂ ਤਾਂ ਫਟ ਲੈ ਲਾ ਕਿਨਾ ਸਮੇਂ ਤੋਲਣਾ ਉਹਨਾਂ ਸਰੀਰ ਕੱਟ ਕੇ ਦੇ ਦਵਾ ਮੈਂ ਆਪਣਾ ਉਹਨਾਂ ਸਰੀਰ ਦਾ ਭਜਨ ਕੱਟ ਕੇ ਸਮੇਂ ਤੋਲ ਲੈਣਾ ਖਪਾਓ ਆਪਣੇ ਸਰੀਰ ਨਾਲ ਚੜਾ ਲਾ ਤੇ ਉਲਟ ਕੇ ਲਾਸ਼ ਹੋ ਸਜਣ ਤੋਲ ਮੈਂ ਉਹ ਸਜਣ ਨੂੰ ਤੋਲਣਾ ਠੀਕ ਹੈ ਬਾਹਰ ਹੈ ਦੀ ਬਾਹਰ ਸਜਣ ਉੱਦਾ ਤੈਲਾ ਫੇਰੀਆਂ ਆ ਖੰਬ ਲਈ ਫੇਰੀ ਉਹ ਤੋਲ ਉਹ ਜੋਗੀਆਂ ਨੂੰ ਕਹੀ ਹੋਈ ਗੱਲ ਦਾ ਜੋਗੀ ਖੱਬਾ ਹੁਣ ਦਰਦਰ ਦੀ ਗੱਲਾਂ ਕਰਦੇ ਹੁੰਦੇ ਸੀ ਉਹ ਕਹਿੰਦੇ ਇਦਾਂ ਨਹੀਂ ਉੱਠਿਆ ਜਾਂਦਾ ਸ਼ਰੀਰ ਸਾਨੂੰ ਤਾਂ ਹੀ ਉੱਠਿਆ ਜਾਂਦਾ ਖੱਬ ਜੀ ਉੱਠਿਆ ਰਿਹਾ ਤੁਸੀਂ ਜੇ ਕੰਭ ਵਿਕੰਦੜੀ ਜੇ ਲਹਾ ਕਿ ਨਾ ਤੋਲ ਤੰਨ ਜੜਾਈ ਆਪਣੇ ਤੁਲਾਹ ਸੁੱ ਤੋਲ ਕਿੰਨਾ ਲੈਣਾ ਹੁੰਦਾ ਸਿੱਧੀ ਕਹਿੰਦੇ ਨੇ ਇੱਥੇ 21 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ hmm.